ਹਾਂਜੀ ਪੌੜੀ ਨੰਬਰ 8 ਜਿਹੜੀ ਕੀ ਇਸ ਵਾਰ ਦੀ ਅਖੀਰਲੀ ਪੌੜੀ ਹੈ ਜੀ ਚਾਰੇ ਜਾਗੇ ਤਹ ਜੁਗੀ ਪੰਚਾਇਣ ਆਪੇ ਹੋਆ ਆਹ ਧੰਨ ਧੰਨ ਜੇ ਚਾਰੇ ਜਾਗਦੇ ਨੇ ਹਾਂਜੀ ਤੇ ਵੇਲਾ ਸਭ ਜੁਗਦਾ ਵੇਲੇ ਅੱਛਾ ਜੀ ਜੁਗਦਾਰ ਸਬੋ ਹੁਦੈ ਜੁਗਦਾਰ ਸੈਂ ਸੰਜੂ ਦਾ ਫਸਤੇ ਰਤਾ ਵੀ ਉਦ ਅੱਛਾ ਜੀ ਕਾਲ ਠੀਕ ਹੈ ਜੀ ਜਦੋਂ ਕਾਲ ਫਲਾਣਾ ਕਾਲ ਹਾਂਜੀ ਸਭੇ ਸਭੇ ਜਿਹੜਾ ਆਪਣੇ ਸਾਥ ਜਾ ਕੇ ਤੇ ਤਰੀਕੇ ਨਾਲ ਠੀਕ ਹੈ ਜੀ ਹਾਂ ਤੁਲ ਜੀ ਵੀ ਆਪੇ ਹੋ ਇਸ ਵੀ ਆਪੇ ਹੋ। ਅੱਛਾ ਜੀ। ਕੋਈ ਬਤਾਰ ਹੈ। ਉਹ। ਕੋਈ ਡੀਜਾ ਅੰਦਰ ਵੀ ਕੋਈ ਦੂਵੀ ਗੱਲ ਨਹੀਂ ਹੈ। ਜਲਬਦਾ ਦਰੂ ਮੜਿਆ ਤੇ ਉਹਨਾਂ ਨੂੰ ਮੜਿਆ ਸੀ, ਵੇਰੂ ਮੜਿਆ। ਤੇ ਸੀ ਇਹਨੇ ਆਪੇ ਹੋਆ ਕੌਣ ਅੱਜ ਇਹ ਗਿਆ ਚੌਥਾ ਇੱਕ ਫਲ ਉਹ ਕੋਗੇ ਇਹ ਵੀ ਉਹ ਆਇਆ ਇਹ ਵੀ ਉਹ ਹੀ ਫਲ ਲੱਗਿਆ ਹੈ ਉਹ ਹੀ ਜਾਂਦਾ ਫਲ ਇਹਨੂੰ ਲੱਗਿਆ ਜਿਹੜਾ ਉਹਨੂੰ ਬੀਜ ਹੈ ਉਹਨੂੰ ਉਦਦਾ ਜਗਦਾ ਹੀ ਹੁੰਦਾ ਅੱਛਾ ਜੀ ਜੀ ਦਵੇ ਸੁੱਤਾ ਪਿਆ ਹੁੰਦਾ ਠੀਕ ਹੈ ਜੇਰ ਜੰਪੇ ਆ ਫਿਰ ठीक है। जब मेरा जगादा भूख भी लगदी है प्यास भी लगदी है। ठीक है। थोड़ा भी देखदा भी है। फैज वस्ता जो जंदा है। फिर हो। ठीक है। अपने आप, आप साजीओंन आपे ही थम्म खलो आ। फैज जमा रह है। अच्छा जी। फैज जमा जमाटे क्या होता है? ਨੇ ਸਾਜਿਓ ਸਾਜਿਓ ਹਾਜੀ ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਆ ਆ ਦੇਖੋ ਨੇ ਆਪ ਸਾਜਿਆ ਸੀ ਆਪੇ ਨੇ ਆਪਣਾ ਬੰਦ ਸਾਜਿਆ ਸੀਗਾ ਹੂੰ ਹੂੰ ਹੁਣ ਸੀ ਮਾਲਰ ਪੜ ਤੋੜਿਆ ਸੀ ਹਾਂਜੀ ਦਰਬਾਨ ਆਪਣੇ ਬੋਲੋ ਲੱਗੋਦਾ ਮਰ ਗੁਰਬਾਣੀ ਸੁਣ ਕੇ ਕੋਈ ਕਿਸੇ ਨਹੀਂ ਧੱਬਿਆ ਵੰਨੂ ਹਾਂਜੀ ਨਾਮ ਦਾ ਮਨ ਧੱਬਿਆ ਗਿਆ ਗੁਰਬਾਣੀ ਪੜ੍ਹ ਕੇ ਪੜ੍ਹ ਕੇ ਹਾਂਜੀ 15 ਸਾਲ ਧੱਬਿਆ ਗਿਆ ਨਾਮ ਦਾ ਵਿਦੇਸ਼ ਨੂੰ ਕੋਲ ਖਰੀਫ ਸੀ ਲੈ ਲਿਆ ਜਵਾਨੀ ਵਿਦੇਸ਼ ਕੀਤਾ ਅਮਰਦਾਸ ਨੂੰ ਲੈ ਲਿਆ ਵਿਦੇਸ਼ ਕੀਤਾ ਜਵਾਨੀ ਹਾਂਜੀ ਦ ਦੂਆ ਚੜਿਆ ਹੋਇਆ ਸੀ ਉਹ ਦੂਆ ਲਾਇਆ ਫਿਰ ਲੁੱਕ ਤੇ ਚਲਿਆ ਇਹਦੇ ਉਪਦੇਸ਼ ਤਾਂ ਜਰੂਰ ਸੁਣਿਆ ਹੈ ਹਾਂਜੀ ਪਰ ਇਹ ਦੀ ਸੁਣਿਆ ਕੋਲ ਪਠਾਲ ਕੇ ਦੀ ਉਪਦੇਸ਼ ਜਿੱਦ ਫੱਦ ਜੁੰਮ ਰਿਹਾ ਕੋ ਸੁਣਿਆ ਅੱਛਾ ਜੀ ਆਪੇ ਉਹਨਾਂ ਪ੍ਰਸਵਝਾ ਲਿਆ ਸੁਣ ਕੇ ਹੀ ਹੂੰ ਉਪਦੇਸ਼ ਸੁਣਿਆ ਜਾਂਦਾ ਸੀ ਉਹਦੇ ਨਾਲ ਬੰਦ ਗਿਆ ਠੀਕ ਹੈ ਜੀ ਜਰਨੀ ਆਪੇ ਹੀ ਥੰਮ ਖਲੋ ਆ ਆਪੇ ਥੰਮ ਕੇ ਖੜ ਗਿਆ ਬੰਦ ਰੋ ਗਿਆ ਬੰਦਰ ਮੈਂ ਇੱਛਾ ਹੋ ਗਈ ਜਦੋਂ ਥੱਬੀ ਹੁੰਦੀ ਹੈ ਬਿਦਰਦਾਈ ਨਹੀਂ ਹੂੰ ਹੂੰ ਨਹੀਂ ਲੱਗਦੀ ਵੀਰ ਦੀ ਜੰਦਗਰ ਚਾ ਬੰਦੀ ਚਾ ਰੋਗੀ ਬੈਠੀ ਬਦ ਕਰਦਾ ਹੁੰਦਾ ਠੀਕ ਜੰਨਾ ਅਜੀ ਆਪੇ ਪੱਟੀ ਆਪ ਆਪ ਇਸ ਲਿਖਣ ਹਾਰਾ ਹੋਆ। ਦੇਦੇ ਦੇਦੀ ਪੱਟੀ ਵੀ ਆਪੀ ਲਿਖ ਰਿਹਾ ਲਿਖ ਰਿਹਾ ਸੁਣ ਰਿਹਾ ਅੱਛਾ ਜੀ। ਪੱਟੀ ਵੀ ਆਪ ਹੈ, ਕਲਮ ਵੀ ਆਪ ਹੈ, ਲਿਖਦਾ ਵੀ ਆਪ ਹੈ, ਬੋਲਦਾ ਵੀ ਆਪ ਹੈ। ਸੁਣੀ ਆ ਲੈ। ਲਿਖੀ ਜਾਂਦਾ ਹੈ, ਆਪੇ ਪਤਾ ਕਿਸੇ ਨੂੰ ਨਹੀਂ ਹੈ। अच्छा जा, दे जी पता ना गुरुवार दा सूर लगया चाचा देखया कहते भैया है या बुड्ढा चाहिए दा फिर है जाता यही है हां जी प्राण तेरे तो ਭਾਜਾ ਦੀ ਗੱਲ ਹੈ ਆਪੇ ਲੇਖੇਰੋਂ ਵੀ ਇਸ ਵਾਈ ਜੱਲੀ ਬਣਾਇਆ ਆਪੇ ਲੇਖੇਰ ਆਵਾ ਹੋਆ ਅੱਛਾ ਜੀ ਘਰ ਤੇ ਬੜੇ ਨੇ ਤਾਂ ਹੀ ਲੋੜੀ ਨੇ ਸਾਰੀ ਠੀਕ ਹੈ ਜੀ ਪੱਜਬਲ ਜੱਪਦਿਆਂ ਨੂੰ ਕੋਈ ਗਿਆਨ ਉਪਦੇਸ਼ ਬਾਕੀ ਜੱਪਦਿਆਂ ਨੂੰ ਉਪਦੇਸ਼ ਲੱਗਿਆ ਨਾ ਆਪਦਾ ਉਪਦੇਸ਼ ਨੂੰ ਉਹ ਵੇਰੂ ਹੈ ਹਾਂਜੀ ਤੇ ਵੀ ਤੁਹਾਡੇ ਜੱਪੇ ਸਾਰੇ ਬੁਰੇ ਸੀ ਲੋਈ ਗੱਲ ਸੁਣੀ ਹੋਣੀ ਹੈ ਹਾਂਜੀ ਬਾਤ ਦੇ ਨੇ ਢੱਲੇ ਦੀ ਸੁਣੀ ਬਚਪਨ ਤੋਂ ਜਾਂਦੇ ਨਹੀਂ ਛੋਡੀ ਜਿਹਨੂੰ ਜਾਂਬਲੂ ਆ ਵੇਹ ਸਦਾ ਬਰਜਾ ਛੋਡੀ ਤੇ ਇਸ ਆਪ ਦੀ ਗੱਲ ਕਰਦੇ ਆ ਇੱਥੇ ਆਪ ਜਿਹੜਾ ਹੈਗਾ ਇਹ ਦੀ ਗੱਲ ਹੋ ਰਹੀ ਹੈ ਆਪਣੇ ਦੰਦ ਅੱਛਾ ਜੀ ਆਪਣਾ ਮਨ ਛਿੱਤ ਕੋ ਕੇ ਬੰਦ ਅੱਛਾ ਜੀ ਵਿਰੋਧ ਨਹੀਂ ਕੀਤਾ ਅੱਛਾ ਜੀ ਉਬ ਉਮਰ ਦੂਜਾ ਦੂਜਾ ਭਾਈਆ ਨੂੰ ਵਿਰੋਧ ਕਰਦਾ ਪਰ ਆਪ ਨਹੀਂ ਬੋਲੇ ਠੀਕ ਹੈ ਜੀ ਲੱਖ ਵੀ ਜਾਣਦਾ ਹੈਗਾ ਉਹ ਵਿਰੋਧ ਕਰਦਾ ਆਪਣੇ ਇਹਨਾਂ ਦਾ ਬੜਾ ਤੇ ਹਾਂਜੀ ਠੀਕ ਹੈ ਜੀ ਜਿਹੜੇ ਵਿਰੋਧ ਕਰਦਾ ਨਹੀਂ ਬੰਦੀ ਚੱਲ ਹਾਂਜੀ ਜਿਹਨਾਂ ਨੇ ਆਪੇ ਬੰਦ ਲਈ ਸਪੈਸ਼ਲੀ ਨਹੀਂ ਬਣਾਉਣੀ ਪਈ ਗੱਲ ਹਾਂਜੀ ਕਿਸ ਨੂੰ ਆਪੇ ਬੋਲਦੇ ਸਭ ਉਮਤ ਆਵਣ ਜਾਬਣੀ ਆਪੇ ਹੀ ਨਵਾਂ ਨਰੋਆ ਉਮਤ ਆਪੋ ਜ ਆਪੜ ਜਾਬੜੀ ਆਪੇ ਨਵਾਂ ਨਰੋਆ ਉਮਤ ਉਹ ਜਾਂਦੀ ਹੈ ਲੁਗਾਈਆਂ ਨੇ ਰਜਾਈਆਂ ਦੇ ਸੋਈ ਜਾਂਦੇ ਹਾਂਜੀ ਆਪੇ ਨਵਾਂ ਨਰੋਆ ਆਪ ਰੋਜ਼ ਨਵਾਂ ਨਰੋਆ ਰੋਜ਼ ਨਵਾਂ ਜਾਂ ਸੰਗਤ ਨੂੰ ਨਵਾਂ ਕੱਥ ਤੇ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੇ ਚੰਦੋਆ ਕੱਥ ਤੇ ਬੈਠਾ ਅਰਜਨ ਗੁਰੂ ਕਹਿੰਦਾ ਤੇ ਕੌਣ ਬੈਠਾ ਹਰਦਾਜ ਕੌਣ ਬੈਠਾ ਹਰਦਾਜ ਬੈਠਾ ਸ਼ਬਦ ਗੁਰੂ ਇਹਦੇ ਜਿਹਾ ਬੈਠਾ ਗਾਨ ਗੁਰੂ ਠੀਕ ਹੈ ਜੀ ਉਹ ਗੁਰੂ ਤਮ ਜਾਨਾ ਪੂਰਾ ਚੰਦ ਰਹਿੰਦਾ ਵਿੱਚ ਠੀਕ ਹੈ ਜੀ ਕੋਈ ਲੈਣਾ ਨਹੀਂ ਹੈ ਤਖਤ ਹੈ ਹਿਰਦਾ ਨਾ ਜਿਹੜਾ ਅਜੰਦਾ ਹਿਰਦਾ ਤਖਤਾ ਉੱਤੇ ਬੋਣ ਬੈਠਾ ਉੱਤੇ ਗਿਆਨ ਗੁਰੂ ਬੈਠਾ ਗਿਆਨ ਪ੍ਰਚਲਦਾ ਉੱਤੇ ਤੇਰਾ ਨੀਅਤ ਠੀਕ ਹੈ ਜੀ ਭਾਵੇਂ ਜਿਹੜਾ ਤਖਤ ਦੇ ਕਹਣ ਨੇ ਉਹ ਤਖਤ ਤੇ ਰਾਜਾ ਤਾਂ ਬਣੇ ਹੀ ਨਹੀਂ ਜਾਂ ਰਾਜਾ ਬਣੇ ਜਿਹੜੇ ਤਖਤ ਤੇ ਬੈਠੇ ਹੋ ਹਾਂਜੀ ਇਹਨਾਂ ਨੂੰ ਅਮ ਜੇ ਟੀਕਾ ਕਰ ਰਹੇ ਉਹ ਇਹ ਦੱਸਦੇ ਆ ਕਿ ਅਰਜਨ ਜਿਹੜਾ ਗੁਰੂ ਹੈ ਨਾ ਉਹ ਤਖਤ ਤੇ ਬੈਠਾ ਉਹਨਾਂ ਨੂੰ ਜਿਹੜੇ ਤਖਤ ਤੇ ਬੈਠਾ ਜਿੱਤੇ ਰਾਜਾ ਸੀ ਉਹ ਤਖਤ ਰਾਜੇ ਦਾ ਹੁੰਦਾ ਨਾਲੇ ਇਹੋ ਪੋਲੀਕਾਰ ਖਾ ਜਾਣੇ ਇੱਥੇ ਵੀ ਜਿਹੜਾ ਮੁਕਤਾ ਹੈ ਇਹ ਮਤਲਬ ਦਾ ਲੱਗੇਗਾ ਵੀ ਅਰਜਨ ਨੀ ਬੈਠਾ ਤਖਤ ਤੇ ਅਰਜਨ ਦਾ ਗੁਰੂ ਬੈਠਾ ਜੋ ਗਿਆਨ ਹੈ ਬਿਲਕੁਲ ਗੁਰ ਗੁਰ ਗੁਰ ਗੁਰ ਉਹ ਜਦਵਾ ਉਸ ਗੁਰੂ ਦਾ ਲੇਖੜਿਆ ਹੋਇਆ ਉਸ ਗੁਰੂ ਦੀ ਵਜਾ ਨਾਲੇ ਜਾਨ ਗੁਰੂ ਦੀ ਵਜਾ ਨਾਲ ਜਦਵਾ ਖੜਿਆ ਹੋਇਆ ਜਦਵਾ ਕੀ ਹੈ ਕਮ ਗਾਂਧੀ ਜੇ ਸਾਰਾ ਆਕਾਸ਼ ਸਾਰਾ ਸਰਦ ਰੋਸ਼ਨੀ ਹੋਇਆ ਹੈ ਪੂਰੇ ਦਾ ਪੂਰੇ ਹੰਦੇ ਚ ਰੋਸ਼ਨੀ ਕਿਤੇ ਵੀ ਕਿਸੇ ਕੋਡੇ ਦੇ ਵਿੱਚ ਤੇਰਾ ਨਹੀਂ ਹੈ ਠੀਕ ਹੈ ਉਹ ਤਾਂ ਤੰਗੂ ਅਤੇ ਦੋ ਅਗੱਤ ਅੱਛਾ ਜੀ ਤੇ ਜਿਹੜਾ ਆ ਜਿਹੜਾ ਅਸੀਂ ਚੰਦੋਏ ਦਾ ਮਤਲਬ ਲਿੰਦੇ ਆ ਉਹ ਚਾਨਣੀ ਚੰਦੋਆ ਇਹ ਦੋ ਅੱਖਰਾਂ ਨੂੰ ਹੋਰ ਕੀ ਹੈ ਠੀਕ ਹੈ ਜੀ ਉਗਵਣ ਲੋਕ ਦਾ ਜਗਾਨਾ ਹਾਂਜੀ ਤੇ ਲੋਕ ਦਾ ਗਿਆਨ ਹਾਂਜੀ ਉੱਗਣੋਂ ਤੇ ਅਥਵਣੋਂ ਚੌਕੱਕੀ ਕੀ ਝੰਲਵਾ ਉੱਗਣੋਂ ਤੇ ਲੈ ਕੇ ਅਥਵਣੋਂ ਤੱਕ ਜਦੋਂ ਚੜਦੇ ਤੇ ਲੈਂਦੇ ਤੱਕ ਜਦੋਂ ਸੂਰਜ ਚੜਦਾ ਉਦੋਂ ਸੂਰਜ ਛਿਪਦੇ ਤੱਕ ਹਾਂਜੀ ਅਸਲ ਤੇ ਆਪਾਂ ਸ਼ਾਮ ਨੂੰ ਹਾਂਜੀ ਦੁਪਹਿਰ ਸ਼ਾਮ ਤੱਕ ਹਾਂਜੀ ਦੁਪਹਿਰ ਤੋਂ ਸ਼ਾਮ ਤੱਕ ਈਸਟ ਟੂ ਵੈਸਟ ਈਸਤ ਤੋਂ ਪੱਛਤ ਤੱਕ ਉਗਵਣ ਕਿਉਂਕਿ ਉਹ ਈਸਤ ਵਿੱਚ ਉਗਦਾ ਹੈ ਸੂਰਜ ਹਾਂ ਹਾਂ ਤੇ ਚੋ ਚੱਕੀ ਦਾ ਕੀ ਮਤਲਬ ਬਣਿਆ ਜੀ ਤਾਰੇ ਪਾਸੇ 4 ਅੱਛਾ ਜੀ ਕੀ ਇਹਨ ਲੋਵਾ ਸਾਰੇ ਜਾਣਦੇ ਦਾ ਚੰਨ ਕੋਈ ਕਿਸੇ ਵੀ ਦੇਸ਼ ਦਾ ਬਤਾਉਣਾ ਉਹਨੂੰ ਕੋਈ ਜਾਣਨ ਬਿਲਦੇ ਹੈ ਦੇ ਕੋਈ ਰੋਜ਼ ਨਹੀਂ ਬੱਲੇ ਕੋਈ ਵੀ ਮੱਤ ਹੈ ਤੁਹਾਡੀ ਦੀ ਕੋਈ ਮੁਸਲਮਾਨ ਕੋਈ ਇਸਾਈ ਤਾਂ ਕਹਿ ਹੈ ਦੀ ਉਹ ਤਾਂ Hindu ਹੈ ਜਾਂ ਉਦਾਸੀ ਹੈ ਜਾਂ ਹੈ ਜੋ ਕਿ ਨਾਨੇਕ ਮਤੀ ਦੇ ਨੇ ਸਰ ਤੋਂ ਸੂਰ ਮਤੀ ਦੇ ਜਿਹੜੇ ਬਾਦੂ ਵੀ ਆ ਜਾਂਦਾ ਕੋਈ ਸਭ ਘਾਤਾ ਰੋਜ਼ ਨਹੀਂ ਦੇ ਰਹੇ ਨੇ ਠੀਕ ਹੈ ਜੀ ਬਾਣੀ ਵਿੱਚ ਈਸਾਈ ਅੱਖਰ ਦੀ ਪਰ ਉਹ ਜਿਹੜੀਆਂ ਵਾਰਾਂ ਉਹਦੇ ਵਿੱਚ ਇੱਕ ਜਗ੍ਹਾ ਈਸਾਈ ਅੱਖਰ ਆਉਂਦਾ 12 ਉਹਦੇ ਜਮਾਨੇ 'ਚ ਲਿਖੀ ਹੋਈ ਹੈ ਉਹਦੇ ਨਾਲ 12 ਜਾਂ ਲਿਖਿਆ ਨੇ ਜਾਂ ਕੀਤਾ ਪਰ ਪਿਛੂ ਲਖੀ ਦੇ ਬਾਰੇ ਲਗਾਈਆਂ ਨੇ ਨਾ ਆਏ ਜਿਹੜਾ ਸਨਾਥਲੀ ਦੇਦ ਨੇ ਅੱਛਾ ਐਗਰੂ ਆ ਵੀ ਸਾਈ ਆਇਆ ਹੋਇਆ ਪਾਜਾ ਵੀ ਜਿੰਨੀ ਗੁਰੂ ਨਾਲ ਸੇਵਿਓ ਮਨ ਪਿਆ ਮੋਆ ਜਿਹਨਾਂ ਗੁਰੂ ਨਾਲ ਸੇਵਿਓ ਨੇ ਖਤ ਗੁਰੂ ਦਾ ਕਰਨੀ ਬਦਿਆ ਬਲੂ আচ্ছা ਜੀ ਉਹ ਬੰਦੇ ਪੁਰਾਣੇ ਵੱਗਾਈਆਂ ਔਰ ਕੀ ਕਰਦੇ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ ਠੀਕ ਹੈ ਜੀ ਇੱਥੇ ਫਿਰ ਗੁਰੂ ਅੱਖਰ ਜਿਹੜਾ ਹੈ ਵਰਤਿਆ ਹੈ ਬਿਲਕੁਲ ਬਿਲਕੁਲ ਬਲੂ ਪਰਮੇਸ਼ਰ ਵਾਸਤੇ ਹੁੰਦਾ ਆਦੀ ਵਾਸਤੇ ਗੁਰੂ ਨਹੀਂ ਹੁੰਦਾ ਠੀਕ ਜੀ ਆਦਮੀ ਵਾਸਤੇ ਤਾਂ ਜਿਹੜਾ ਭਗਤਾਂ ਨੇ ਦਾਸ ਵਰਤਿਆ ਇਹ ਤੋਂ ਵੱਡਾ ਕੋਈ ਹੁੰਦਾ ਹੀ ਨਹੀਂ ਦੇਖੋ ਨਾ ਜਿਹੜਾ ਦਾਸ ਉਹ ਦੰਦ ਦਾ ਛੋਟਾ ਹੈ ਬੜਾਈ ਸਰਦਾਰ ਜਿਹਨੂੰ ਲਈ ਦਾਸ ਨੂੰ ਆਪਣੇ ਦਾਸ ਕੋ ਦੇ ਬੜਾਈ ਆਪਣੇ ਦਾਸ ਕੋ ਲਗ ਜਪਾਈ ਆਪਣੇ ਦਾਸ ਦੀ ਆਪਤ ਰੱਖੇ ਠੀਕ ਹੈ ਵਿਆਖਿਆ ਹੋਈ ਹੋਈ ਹੈ ਗੁਰੂ ਪਰਵੇਸ਼ਰ ਗੁਰੂ ਤੋਂ ਵੱਡਾ ਕੋਈ ਨਹੀਂ ਤੇ ਦਾਸ ਤੋਂ ਛੋਟਾ ਕੋਈ ਨਹੀਂ ਪਰ ਸੰਸਾਰ ਕੌਬਲੇ ਨੇ ਪਾਉਂਦੇ ਹੈ ਜੀ ਹੋਰ ਕੋਈ ਪਾਉਂਦੇ ਪੰਜੇ ਤੱਕ ਪਰਮਿਸ਼ਨ ਦੀ ਗੱਲ ਉਹ ਸਭ ਨੇ ਦੱਸੇ ਠੀਕ ਹੈ ਜੀ ਉਹ ਤੇ ਦੱਸ ਉਹ ਜਿਹੜੇ ਸਾਖਤ ਨੇ ਉਹ ਨਹੀਂ ਬੰਦੇ ਸਾਖਤ ਗੁਰੂ ਬਣ ਨੇ ਸਾਖਤ ਗੁਰੂ ਆ ਕੁਝ ਨਹੀਂ ਗੱਲ ਗੁਰੂ ਜੀ ਭਰਿਆ ਮੈਂ ਫੇਰ ਲੋਕਾਂ ਦੇ ਦਰਵਾਜ਼ੇ ਲੋਕਾਂ ਦੇ ਦਰਵਾਜ਼ੇ ਕੀ ਜਾਂਦੇ ਨੇ ਮੇਰੇ ਤੰਦਰੇ ਤੋਂ ਬਹੁਤ ਆਸ ਸੀ ਹਾਂ ਜਾਨ ਹੋਇਆ ਤੇ ਠੀਕ ਜਿਹੜੇ ਲੋਕ ਨੇ ਸਾਕਰ ਤਾਂ ਇਹਦੀਆਂ ਗੱਲਾਂ ਨੂੰ ਸਭ ਨੇ ਜਾਨ ਪੁੱਝੀਆ ਕਰਦੇ ਨੇ ਕੋਈ ਨਹੀਂ ਬੱਤਾ ਆਪਣੀਆਂ ਨਾਲ ਜਾਂਦੀ ਇਹਦੇ ਨਾਲ ਨਹੀਂ ਉਹ ਦੋਈ ਬਾਤ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ ਉਹਨਾਂ ਨੇ ਹਰ ਤੋਂ ਹਰ ਤੋਂ ਬਚਾਇਆ 200 300 ਸਾਲ ਵਿਚ ਚਾਲ ਨਹੀਂ ਦਿੱਤਾ ਹੁੰਦਾ ਠੀਕ ਹੈ ਦੋਨੋਂ ਦੀ ਸਾਰੀ ਗੱਲ ਕਲੀਅਰ ਹੈ ਦੋਣੀ ਚੌਣੀ ਸੱਚੇ ਕਾ ਸੱਚਾ ਢੋਆ ਸੱਚੇ ਦਾ ਸੱਚਾ ਢੋਲਾ ਹੰਕਾਰ ਹਾਲ ਬੰਦ ਜਾਣਾ ਗਲਾ ਬੰਦ ਹੋ ਜਾਂਦੀ ਹੈ। ਅੱਛਾ ਜੀ। ਜੇ ਮਨ ਹਾਲ ਬੰਦ ਗਿਆ ਤਾਂ ਗਲਾ ਬੰਦ ਹੋ ਗਈ। ਜਗਜੀਤਿਆ ਗਿਆ। ਮਨ ਜੀਤੇ ਜਗਜੀਤ ਚੌੜੀ ਗਲਾ ਬੰਦ ਕਰਦੇ। ਚੌੜੀ ਗਲਾ ਸੱਚੇ ਦਾ ਸੱਚਾ। ਓ ਤਾਂ ਜੇ ਤੋਂ ਇਹਦਾ ਮਨ ਹਮਲਾ ਹੁੰਦਾ ਜੀ। ਹਾਂ। ਤਾਂ ਤੇ ਹਮਲਾ ਕੀਤਾ ਬੰਦੇ ਉੱਤੇ। ਅੱਛਾ ਜੀ। ਅੱਜ ਦੇ ਗਿਆਨ ਦਾ ਹਮਲਾ ਹੋਇਆ ਮਨ ਕੋ ਤਾਂ ਜੂੜਦਾ ਗਿਆ ਹੁੰਦਾ ਸਾਰਾ। ਅੱਡਾ ਗਿਆ ਨਹੀਂ ਕਿਤੇ। 라ਜਵਾਬ ਹੋ ਗਿਆ ਮਨ ਨੂੰ। 라ਜਵਾਬ ਹੋਣ ਦਾ ਗਿਆ ਗਿਆ। ਹੂੰ ਕਰਦੀ ਕਿ ਜਾਂਦੀ ਹੈ। ਸਾਰੇ 라ਜਵਾਬ ਹੋ ਕੇ ਖੜ ਜਾਂਦੇ ਨੇ। ਠੀਕ ਹੈ ਜੀ। ਚਾਰੇ ਜਾਗੇ ਚੌਜੂਗੀ ਪੰਚਾਇਣ ਆਪੇ ਹੋਆ। ਹਾਂ ਜੀ ਚਾਰੇ ਜਾਗੇ ਆਪੇ ਸੀ। ਉਹ ਜਿਹੜਾ ਚਾਰਾਂ ਚੁਗਣ ਦੀ ਹੋਈ ਬਜਗੋ ਸੀ ਕੋਈ ਫਰਕ ਨਹੀਂ ਸੀ। ਅੱਛਾ ਜੀ। ਹੈ। ਉਹੀ ਹੈ ਜੀ। ਤੇ ਕਲੀ ਕੀ ਬਾੜ ਰਾਏ ਬਲਵੰਡ ਅਤੇ ਸੱਤੇ ਡੂਮ ਆਖੀ।